ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅਗਾਭੋਚਰਾ ਤੇਰਾ ਅੰਤ ਨਾ ਪਾਇਆ ਦੇਖੋ ਅਗਾਭੋਚਰ ਮਨ ਵੀ ਅਗਾਭੋਚਰ ਇਹ ਬੁੱਧੀ ਦੀ ਰੇਤੋ ਫਰੇ ਗਿਆ ਜਿਹੜਾ ਕਾਰ ਹਮੇਸ਼ਾ ਅਗੋਚਰ ਤੇਰਾ ਅੰਤ ਨਾ ਪਾਇਆ ਤੇ ਅਲਤਪਾਲ ਤੇ ਤੁਹਾਨੂੰ ਨਾ ਨੇ ਤੇ ਵੱਦ ਉਹਨੂੰ ਵੀ ਬੁਲਾ ਸਕਾਇਆ ਸੀ ਉਹ ਵੀ ਗੁਰੂ ਨੇ ਬੁਲਾਇਆ। ਉਹ ਬਾਹਰੇ ਦੇ ਉਹ ਵਾਇਆ ਵਦੂ ਉੱਤੇ ਬੜੀਆ ਕੰਦੇ। ਬੁੱਧੀ ਬਾਤ ਦਾ ਮਨ ਵੀ ਕਬੂਕ ਹੋ ਚੀ ਸੀ। ਪਰ ਮੈਂ ਸ਼ਦਾ ਕਬੂਕ ਹੋਣੀ ਆ। ਇਹਦਾ ਮਨ ਵੀ ਕਬੂਕ ਹੋ ਬਣਿਆ ਬੈਠਾ ਸਾਡੇ ਵਾਸਤੇ ਤੁਹਾਨੂੰ। ਅੰਤੋਂ ਦਾ ਭਾਇਆ ਕਿਨੇ ਸੇਰਾ ਆਪਣਾ ਆਪ ਤੂੰ ਜਾਣੇ। ਆਪਣਾ ਆਪ ਤੂੰ ਜਾਣ। ਜਿਹੜਾ ਇੱਕ ਹੈ ਅਗਬੋਕੋਚਰ। ਇੱਕ ਵਾਰ ਇਹ ਦੁਨੀਆਂ ਦੀ ਜਾਣਦੀ ਸਾਰੇ ਤੁਹਾਨੂੰ ਵੀ ਇੱਕ ਦੀ ਗੱਲ ਕਰਦੇ ਨੇ ਕਿ ਵਿਆਖਿਆ ਕੋਈ ਨਹੀਂ ਕਰ ਰਹੀ ਇੱਕ ਠੀਕ ਹੈ ਇਹ ਆਤਮਾ ਬਾਰੇ ਸਾਰੇ ਗੱਲ ਕਰਦੇ ਨੇ ਆਤਮਾ ਬਾਰੇ ਆਤਮਾ ਦੀ ਵਿਆਖਿਆ ਕੋਈ ਨਹੀਂ ਕਰ ਰਹੀ ਆਤਮਾ ਉਹਦੀ ਕੀ ਹੈ ਇਹਦਾ ਸਰੂਪ ਕੀ ਆਤਮਾ ਬੰਦੇ ਸਰੂਪ ਬਾਰੇ ਕੋਈ ਨਹੀਂ ਦੱਸ ਰਹੀ ਕੀ ਇਹਦੇ ਸਰੂਪ ਕੋਈ ਨਾ ਲੈ ਇਕਦਈ ਜੇ ਤਰ ਬੰਦੋ ਢਾਲ ਵਿੱਚ ਤਾਂ ਹੋਈ ਹੋਈ ਜਰੂਰ ਢਾਲ ਵਿੱਚ ਤਾਂ ਹੋਈ ਹੋਈ ਜੇ ਢਾਲ ਵਾਲੇ ਗਾਇਬ ਹੋ ਗਿਆ ਇਕਦਈ ਗਾਇਬ ਹੋ ਗਿਆ ਕੋਈ ਹੈ ਇਕਦਾਂ ਗਿਆਨ ਹੈ ਜਦ ਹੋਣਾ ਹੈ ਢਾਲ ਦਾ ਹੋ ਜਾਂ ਸਿੱਧਾ ਇਕਦਾਂ ਗਿਆਨ ਕਿਸੇ ਨੂੰ ਹੋਇਆ ਨਾ ਹੋਵੇ ਨਾ ਇਹ ਕਦੀ ਪ੍ਰਾਪਤੀ ਸiddhi ਕਿਸੇ ਨੂੰ ਹੋਈ ਨਾ ਹੋਵੇ ਇਹ ਵੀ ਪ੍ਰੇਖਾ ਚ ਨਹੀਂ ਰਹਿ ਇਸੇ ਕਰਕੇ ਇੱਕ ਨਹੀਂ ਪ੍ਰਾਪਤੀ ਰਹੀ ਹੋਈ ਕਿਸੇ ਨੂੰ ਲੋਕਾਂ ਨੇ ਦਾਲ ਤੋਂ ਸਟਾਰਟ ਕੀਤਾ ਹੈ ਵਰਵਾਦ ਨੇ ਦਾਲ ਤੋਂ ਸਟਾਰਟ ਕੀਤਾ ਹੈ ਪਹਿਨਾ ਤਾਂ ਜੋ ਮਾਨੂ ਖੋਜਣ ਫਿਰ ਮੰਦੇ ਵਿੱਚ ਉਹ ਹੈਗਾ ਹੀ ਵਦੋਏ ਲੱਭ ਕੇ ਜਿੱਨਾ ਜਰ ਤਾਲ ਵਿੱਚੋਂ ਮਾਨੀ ਖੋਜਿਆ ਜਾਂਦਾ ਤਾਂ ਬੋਲ ਵਿੱਚ ਉਹ ਆਪ ਹੈ ਦੋ ਲੱਭੇ ਤੇ ਕੰਬੂ ਬੋਚਰੇ ਬੜੀ ਹੋਈ ਹੈ ਗੱਲ ਸਾਰੀ ਅੰਤਰੋਂ ਪਾਇਆ ਕਿਨੇ ਤੇਰਾ ਅੰਤ ਤਰੀ ਪਾਇਆ ਤੇਰਾ ਕਿ ਕਦੋਂ ਤੋ ਤੂ ਤੇ ਕੋ ਕਹਿ ਨਾ ਸਕੇ ਕਦੋਂ ਦਾ ਤੂ ਹੈ ਗਰਭ ਚੋਂ ਹੋਇਆ ਕਿੰਦੀਆਂ ਜੁਦਾ ਭੁਗਤ ਪਿੱਛੇ ਉਹਦਾ ਕੀ ਸੀ ਪਹਿਲਾਂ ਕਿੰਨੇ ਸਾਲ ਦਾ ਸੀ ਜੁਦਾ ਤੇ ਦੁਆਜਨ ਸਾਜ ਖੜ ਜਿਆ ਅਦੇ ਇਹਦੇ ਬਾਰੇ ਕੋਈ ਨਹੀਂ ਦੱਸ ਰਿਹਾ ਕੁਝ ਵੀ ਇਹ ਜੀਵ ਇਹ ਕਮੂਚ ਰ ਹੈ ਆਪ ਇਹ ਕਾ ਕਮੂਚ ਰ ਦਾ ਜੀਵ ਵੀ ਇਹ ਵੀ ਕਮੂਚ ਰ ਹੈ ਆਪਣਾ ਆਪ ਤੂੰ ਜਾਣਹੀਂ ਆਪਣਾ ਵਹੀ ਜਾਣੂਗਾ ਹੋਰ ਕੌਣ ਜਾਣੂਗਾ ਆਪਣੇ ਦੋਨੋਂ ਆਪ ਜਾਣੂਗਾ ਦੁਆਜਨ ਦਾ ਬਿਲਤਾ ਹੁੰਦਾ ਆਪਣੇ ਬੰਦੂ ਨਾ ਜਾਣਦੇ ਅਸੀਂ ਦੂਰ ਵੱਟ ਕੀਆ ਕੋਈ ਜਾਣਦਾ ਬਸ ਆਪਣਾ ਆਪ ਜਾਣਦਾ ਹਰੇਕ ਜੇ ਤੂੰ ਜਾਣਦਾ ਮੈਂ ਕੁਝ ਆਪਣਾ ਆਪੇ ਜਾਣਦਾ ਨਾ ਸਾਰੇ ਤਾਂ ਜਾਣਦਾ ਨਹੀਂ ਬਸ ਆਪਣਾ ਆਪ ਤੂੰ ਜਾਣ ਰਿਹਾ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣਾ ਏ ਅ ਜੀ ਜੀ ਔਰ ਜੰਤ ਜੀ ਕੀ ਹੈ ਜੰਤ ਦਾ ਜੀਵਨ ਅਸਰੀਰ ਦਾ ਜੀਵਨ ਜੀ ਹੈ ਅਗਾਂ ਨੂੰ ਗੋਚਰ ਕਰਨਾ ਪ੍ਰਾਤਮ ਨੂੰ ਗਿਆ ਦਾ ਗੋਚਰ ਮਨ ਦੇ ਵਿੱਚ ਉਹ ਹੈਗਾ ਮਨ ਨੂੰ ਕੋਈ ਪਤਾ ਨਹੀਂ ਆਠਵਾਂ ਲੈ ਕੇ ਚਾਵਨਵਾਸ ਕਰਦਾ ਤੇ ਉਹਨੂੰ ਕੋਈ ਜਾਨਦੀ ਕਿਤੇ ਰੜਕਦਾ ਹੋਵੇ ਤਾਂ ਪਤਾ ਲੱਗੇ ਕਹਿ ਲੈਣਾ ਸਭ ਦੇ ਅੰਦਰ ਹੈ ਸਮਝੇ ਅੰਦਰ ਕਹਿ ਲੈਣਾ ਸਾਰੇ ਤੁਨ ਪਰ ਕਿਸੇ ਨੇ ਦੇਖਿਆ ਅੰਦਰ ویے کسے نو بے بار گد ڈوڑ دے جے کسے نو تھوڑی جی بھی بھنک پے جے اندر ہے باہر کا تے ڈوڑ دے باروں کا تے بول دے تے شروع ہو جاندے سونی ہوئی گل لا گوتھیے بلڑی گل ਕਬੂਦ ਖਮ ਉਹਨੂੰ ਤਾਂ ਕਿਹਨੂੰ ਪਰਸ ਆਣੀ ਜਿਹੜੇ ਬਾਹਰ ਵਰਦੇ ਨੇ ਕੁਝ ਜਿਹੜੇ ਕਹਿੰਦੇ ਨੇ ਗੁਰਦਾਨ ਦਾ ਦਰਸ਼ਨ ਹੋਇਆ ਸਾਨੂੰ ਉਹ ਤਾਂ ਬਿਲਕੁਲ ਡਫਰ ਨੇ ਡਫਰ ਬੁੱਧੂ ਵੀ ਕਹਿ ਸਕਦੇ ਉਹ ਉਹ ਡਫਰ ਨੇ ਜਾਣਵਜ ਕੇ ਗੱਲ ਨੇ ਸ਼ਾਤਰ ਨੇ ਬਹੁਤ ਤਗੜੇ ਸਿਕਨ ਉਸ ਦੂਬਰ ਨੂੰ ਚਾਹੁੰਦੇ ਸੁਰ ਘਰ ਮੱਤ ਤੱਕ ਜਾਣਾ ਚਾਹੁੰਦੇ ਲਾਈਨ ਬਦਲਦੀ ਜਾਂਦੇ ਖਰੀਦਿਆ ਕਰ ਖਰੀਦਿਆ ਨਹੀਂ ਉਹ ਮਦਦ ਖਰੀਦਿਆ ਕਰਦੇ ਨੇ ਦਰਮਾੜਾ ਉਹ ਵੀ ਖਰੀਦਿਆ ਹੈ ਯਾਨੀ ਸਿੱਧਾ ਉੜਾ ਗਿਆ ਇੱਕ ਅੰਦਰ ਸਿੱਧਾ ਹੀ ਲੋ ਕਿ ਮੈਂ ਸਾਰੇ ਲਾਈਨ ਤੋਂ ਲੈ ਜਾ ਤਰੂ ਤੇ ਤੁਹਾਨੂੰ ਦਾ ਬੜਾ ਖਤਰਾ ਹੈ ਸਾਰਿਆਂ ਨੂੰ ਉਹ ਵੀ ਜਾਣਿਆ ਖਤਰਾ ਗੁਰੂ ਵੇਲੇ ਵੀ ਰਿਆ ਭਗਤਾਂ ਵੇਲੇ ਵੀ ਰਿਆ ਸਾਰੇ ਉਹਨਾਂ ਦੇ ਸਾਧਨ ਵਰਤ ਕੇ ਤਰਬ ਨੂੰ ਹਾਈਲਾਈਟ ਹੋਣ ਤੋਂ ਰੋਕਦੇ ਰਹੇ ਉਲਝੇ ਹੋ ਗਏ ਨੇ ਰੁਕਦੇ ਰਹਿਣ ਪਰ ਜਦ ਨਾਲ ਜਦੋਂ ਜੜਾ ਹੋੜਾ ਹੋਇਆ ਜੋ ਪਰਮੇਸ਼ਰ ਨੇ ਕਰ ਦੋ ਜਿੰਨਾ ਜਿਆਦਾ ਰਿਐਕਸ਼ਨ ਕਰ ਲਗੇ ਉਦੋਂ ਛੇਤੀ ਫੈਲੂਗਾ ਚੁੱਪ ਕਰ ਜਾਣਗੇ ਹੌਲੀ ਫੈਲੂ ਕੋਈ ਜੀਵੇ ਜਿੰਦਾ ਜਿਆਦਾ ਰੋਣਾ ਬੈਜਾ ਜਿਆਦਾ ਫੈਲ ਜਾਂਦੀ जी ਜੰਤ सब खेल तेरा क्या ਕੋ ਆਖ ਬਖਾਣੇ ਕੀ ਦਾ ਖੇਲ ਹੈ ਜੀ ਜੰਤ ਜਿਹੜਾ ਮੂਲ ਦੇ ਅੰਦਰ ਉਹਦਾ ਜੀ ਜੰਤ ਖੇਲ ਉਹਨੇ ਆਪਣੇ ਜੋ ਜੀ ਪੈਦਾ ਕੀਤਾ ਸਰੀਰ ਦੇ ਵਿੱਚ ਜੀ ਦਾ ਪਰਮੇਸ਼ ਹੋਇਆ ਖੇਲ ਕੀ ਦਾ ਹੋਇਆ ਪਿਛਲੇ ਨੇ ਹੋਇਆ ਜਿਹਾਂ ਨੂੰ ਅੱਖ ਬਖਾਉਂ ਹਾਂ ਜੀ ਆ ਜੰਤ ਜਿਦਾ ਮਾਨਾ ਉਹਦੀ ਗੱਲ ਹੈ ਉਹ ਲਖੇ ਦਾ ਜੀ ਜਨ ਸਭ ਕਿਆ ਗਵਾਕ ਬੁਖਰ ਕੋਈ ਕੋਈ ਕੀ ਗਏ ਕੋਈ ਕੀ ਦਸਲ ਦੇ ਤੇ ਤੇਰਾ ਖੇਲ ਹੈ ਉਹ ਜਿਹਦੇ ਹੱਥ ਚ ਡੋਰੀ ਹੈ ਜਿਹਦੀ ਗੱਲ ਕਰਦੇ ਪਰ ਡੋਰੀ ਹੈ ਤੁਹਾਡੀ ਪਰ ਆਪਣੀ ਡੋਰੀ ਕਿਤੇ ਹੋਰ ਹੋਊਗੀ ਉਹ ਛੱਡੋ ਪਰੇ ਉਹ ਦੀ ਗੱਲ ਗਾਓ ਆਖੇ ਤਾਂ ਵੇਖਾਂ ਸਭ ਤੂੰ ਹੈ ਆਖਾ ਦਾ ਵੇਖਾ ਦਮ ਤੂੰ ਜਿਨੀ ਜਗਤੋਂ ਪਾਇਆ ਆਖਾ ਦਾ ਵੇਖਾ ਦਮ ਤੂੰ ਆ ਜਿਹੜਾ ਕੁਝ ਕਿਹਾ ਗਿਆ ਲੋ ਰਮਗੋਚੇ ਤੇ ਬਾਰੇ ਰਮਗੋਚੇ ਤੇ ਬਾਰੇ ਜੋ ਕੁਝ ਕਿਹਾ ਗਿਆ ਲੋ ਇਕੱਠ ਇਕੱਠ ਦੀ ਘਾਣ ਜੇ ਕਦੀ ਗਈ ਹੈ ਕਿਤੇ ਕਥਨ ਜੇ ਉਹਦਾ ਕਥਨ ਵੀ ਕੀਤਾ ਗਿਆ ਤਾਂ ਆਦਮੀ ਨੇ ਨਹੀਂ ਕੀਤਾ ਕਥਨ ਇਹ ਵੀ ਲੱਗ ਆਖੇ ਤਾਂ ਵੇਖਿਆ ਸਭ ਆਖਿਆ ਵੀ ਤਾਂ ਬੇਠ ਗਿਆ ਵੀ ਤਾਂ ਵੇਖ ਕੇ ਆਖਿਆ ਜੋਕ ਸੁਬੋਲਣ ਜੋ ਪੇਖੇ ਤੈ ਉਹ ਆਖਿਆ ਇਹ ਜੀਵਨ ਦਾ ਜਿਵੇਂ ਤੈ ਬੁਲਾਇਆ ਹੋਏ ਬੋਲਦਾ जिनेर तो पाया हां जिनेर तो पाया जिने जंत पैदा कीता है जीव, वो ओने बणाया है बोलया अ तेदु बणाया है दरगाया ने ए आया आला इरु तुर्की वाणी तेदु आई सदगुरु ते नाम पाया जाए नाम तेंनु आया पाया है नि ते तो सदगुरु ते बोलता ਆਖਿਆ ਵੀ ਆ ਵੇਖਿਆ ਵੀ ਤੈਨ ਵੇਖਿਆ ਨਾ ਇਹਦੇ ਕੋਲ ਦੱਤ ਖ ਦੂਜਾ ਨੇ ਉਹ ਅੱਖਾਂ ਇਹਦੇ ਕੋਲ ਦੀਆਂ ਅੱਛੇ ਅਖੜੀਓ ਪਿਆਨ ਨਾੜ ਸੇ ਅਖੜੀਆਂ ਪਿਆਨ ਉਹ ਅੱਖਾਂ ਤੇਰੇ ਕੋਲ ਦੇ ਵੇਖਣ ਵਾਲੀਆਂ ਤੇਰੇ ਕੋਲ ਅੱਖਾਂ ਹੀ ਦੀ ਗੱਲ ਕਹੀ ਹੋਈ ਹੈ ਦੇਖ ਕੇ ਸੋ ਬੋਲੇ ਉਹ ਤੇ ਬਬਰਾਂ ਪਿਆ ਸੀ ਦੇਖਿਆ ਕਿਹਦੇ ਸੀ जिद्द देखेसी जिद्द देखेसी होई ना दे सुनो मेरे को ता अखाई नहीं है देखना नहीं को बोल रहा को अखदी है ना वो जो जोड़ा सी हुर दी गल है ना पिछली गल है फिर ये ता हुर दे हुर कह रहे है ए बुलाया ही बोलदा ओ बुलाया बोल दे नु एडी एमे बड्याई बुरखरे देती चाके है साहब ਜਿਹੜੀ ਉਹਨਾਂ ਨੇ ਕਹਿਆ ਤੇ ਇੱਥੇ ਕੇ ਰੱਖਿਓ ਸਾਡੀ ਦਰਜਾ ਉਹ ਤੇ ਦਰਜਾ ਨਹੀਂ ਰੱਖਿਆ ਦਰਜਾ ਵਧਾਤਾ ਤਾਂ ਹੀ ਕੁਝ ਨਹੀਂ ਲੱਭਿਆ ਇਹਨਾਂ ਨੂੰ ਗੁਰਬਾਣੀ ਚ ਲੱਭਦਾ ਤਾਂ ਕੇ ਦਰਜਾ ਉਹਨਾਂ ਹੀ ਰੱਖਦੇ ਜਿਨ੍ਹਾਂ ਨੇ ਉਹਨਾਂ ਨੇ ਆਪਣਾ ਦਰਜਾ ਬਿਠਾਇਆ ਸੀ ਤੇ ਦੱਸਿਆ ਸੀ ਇਹਨਾਂ ਨੂੰ ਗੁਰਬਾਣੀ ਚ ਬੇਂਡਾ ਸਾਡਾ ਦਰਜਾ ਤੇ ਬਾਹਰੋਂ ਵਧਾਇਓ ਇਹਨਾਂ ਨੇ ਕਹਾ ਵਧਾਤਾ ਉਹ ਦਰਜਾ ਲੱਭਣਾ ਕੀ ਸੀ ਉੱਥੇ ਗਾਲੇ ਛੜਤੇ ਉਹ ਜਲਾ ਉੱਤੇ ਬੈਠਾ ਪਿਛਲੇ ਪਾਸੇ ਬੈਠਾ ਪ੍ਰਾਤਬ ਉਹ ਛੜ ਦਿੱਤਾ ਦੇਦਾਈ ਭਰਲੇ ਆ ਬੱਕੀ ਦੋਏ ਛੜਦੇ ਦੋਸ ਨੇ ਜਾਉਂ ਰਹੇ ਨੇ ਬਾਣੀ ਸਾਡੀ ਰੰਤੋ ਆ ਰਹੀ ਹੈ ਸੁਣ ਜਾਂਦਾ ਜਿਹੜਾ ਸਾਰੇ ਉਰੂ ਉਹਦੇ ਸਿਰੂ ਇਹਨੂੰ ਆ ਰਹੀ ਹੈ ਉਹ ਦੋਏ ਛੜਦੇ ਵਿਚਲੇ ਵਿੱਚੋਂ ਗੜਦੇ ਉਹ ਗੁਰਬਾਣੀ ਹੈ ਸੰਤ ਜਨਾ ਮਿਲ ਇਹ ਜਾਣਾ ਜਿਹੜਾ ਬੋਲਣ ਵਾਲਾ ਤਾਂ ਜਾਣ ਉਹ ਸੰਤ ਇਹਦਰ ਵਾਲਾ ਜੀ ਬਾਰੀ ਆਈ ਹੈ ਸੁਣੀ ਹੈ ਨਾ ਸੰਤ ਮਿਲੇ ਨਾਨਕ ਦੇ ਸੰਤ ਮਿਲੇ ਤਾਂ ਸੱਚ ਪਾਈ ਹੈ ਸੱਚ ਨੂੰ ਮਿਲੇ ਆ ਇਹਨੂੰ ਦੱਸਿਆ ਇਹ ਤਾਂ ਬਲਵਾਇਆ ਜਿੰਨਾ ਚਿਰ ਇਸ ਗੱਲ ਦੀ ਸਮਝ ਨਹੀਂ ਹੋਈ ਆਈ ਜੀ ਨੂੰ ਉਹਨੇ ਗੁਰਬਾਣ ਨੂੰ ਕੀ ਥੋੜਾ ਤੇ ਹੈ ਨਾਨੇ ਕਹਦਾ ਆਪਣੇ ਧਲੇ ਨੂੰ ਤੂੰ ਤਾਂ ਸਦਾ ਹੀ ਗੱਬ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਤੇਰਾ ਅੰਤ ਕਿਥੋਂ ਪੜ ਲ ਪੇਟਾ ਰਾ ਜਾਲੂ ਕੀ ਜਾਲੇ ਪੂਤ ਮੇਰਾ ਅੰਤ ਦਾ ਤੂੰ ਜਾਣਦਾ ਮੈਂ ਤੇਰਾ ਅੰਤ ਕਦੇ ਪਾ ਲੂੰ ਤੂੰ ਐਂ ਜਾਗਦਾ ਬਸ ਹੋ ਜੂਦਾ ਜਾਗਦਾ ਵਾ ਤੇ ਪੈਦਾ ਹੋਇਆ ਤੇਰਾ ਅੰਤ ਮੈਂ ਛੂ ਜਰੂਗਾ